किथों उपजे कह रहे कह माहे समावे जी जंत सब खसम के कौन कीमत पावे कने किथों उपजे जीव किथों पैदा होया जी उपजा किथों है उपजा ही भाई कह रहे रहया करते उपजे आवे रहया करते मैंने कहते जी काहे गए समावा या दोबारा समाउंदा फिर किथे समाउंदा ਸਭੋ ਦਾ ਜਵਾਬ ਹੈ ਜੇਤੇ ਹੁਕਮ ਜਿੱਤ ਹੈ ਮਿਲਿ ਤੇ ਨਾ ਦਾ ਜਵਾਬ ਹੈ ਹੁਕਮ ਹੈ ਆਵਾ ਹੁਕਮ ਲਾਏ ਹੁਕਮ ਨੇ ਰਹੇ ਸਮਾਇਆ ਹੋਇਆ ਤਾਂ ਵੀ ਹੁਕਮ ਦੇ ਵਿੱਚ ਹੁਕਮ ਨੇ ਬਾਹਰ ਨਹੀਂ ਆ ਸਕਦਾ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਜੀ ਜੰਤ ਸਾਰੇ ਖਸਮ ਕਰੇ ਚਰ ਤੇ ਸਰੀਰ ਵੀ ਖਸਮ ਨਾ ਜੀ ਵੀ ਖਸਮ ਨਹੀਂ ਲੇ ਕੌਣ ਕੀਮਤ ਪਾਵੈ ਕੌਣ ਇਹਨਾਂ ਦੀ ਕੀਮਤ ਕੌਣ ਪਾ ਸਕਦਾ ਕੋਈ ਨਹੀਂ ਦੱਸ ਸਕਦਾ ਇਹਨਾਂ ਬਾਰੇ ਹਾਂਜੀ ਕਹਿਣ ਧਿਆਨ ਸੁਣਨ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬੋ ਦੂਸਰ ਲਾਵੇ ਨਾ ਲਾਵੇ ਜਿਹੜੇ ਕਹਿੰਦੇ ਨੇ ਧਿਆਨ ਧੰਦ ਰੱਖਦੇ ਨੇ ਸੁਣ ਸੁਣ ਵਾਲੇ ਵੀ ਨੇ ਸੁਣਨ ਜਿੱਤ ਜਿੱਤ ਸੁਣਨ ਵਾਲੇ ਨੇ ਤੋਂ ਪਰ ਸੁਹਾਵੇ ਉਹਨਾਂ ਨੂੰ ਕੀ ਕਹਿੰਦੇ ਨੇ ਉਹ ਭਗਤ ਨੇ ਉਹ ਤੇਰੇ ਦਰਵਾਜ਼ੇ ਖੌਂਦੇ ਨੇ ਕਹਨੇ ਵਾਲੇ ਵੀ ਨੇ ਥੋੜਨੇ ਵਾਲੇ ਵੀ ਨੇ ਉਹ ਥੋੜੇ ਸੁਖ ਸਾਗਰ ਜਿੱਤੇ ਦੇ ਦਰਵਾਜ਼ੇ ਰਹਿਣ ਵਾਲੇ ਐਂ ਧਿਆਨ ਰਸੋਲ ਦਿੱਤ ਤੇ ਭਗਤ ਸੁਆਗਵ ਭਗਤ ਨੇ ਅਗਰ ਕੀ ਵਿਵਸਥਾ ਹੈ ਸੁਆਗਵ ਸੋਹਣੇ ਲੱਗਦੇ ਨੇ ਹਸਾਲ ਨੂੰ ਵੀ ਹਰ ਤੋਂ ਦਾ ਹਿਰਦਾ ਵੀ ਸੁਖ ਚ ਨਿਵਾਸ ਆਖਣ ਵਾਲੇ ਅਗਾਂ ਅਗੋ ਸਾਹਿਬੋ ਦੂਸਰ ਲਵੇ ਨਾ ਅਗੰਗੂ ਗੋਚਰ ਸਾਹਿਬ ਉਹਦੇ ਨਾਲ ਨੇ ਜੁੜੇ ਹੋਏ। ਦੂਜਾ ਨਹੀਂ ਕੋਈ ਲਵੇ ਲਾਉਂਦਾ ਹੋਰ ਦਾਸ ਅਸਿਕਾ। ਦੂਜਾ ਕੌਣ ਲਵੇ ਲਾਉ? ਅਗੰਗੂ ਗੋਚਰ ਸਾਹਿਬ ਉਹ ਕੋਈ ਲਵੇ ਲਾਉ। ਸੱਚ ਪੂਰੇ ਗੁਰੂ ਦੇ ਸਿਆ ਧਾਨਕ ਸੁਣਾਵਾ। ਜੇ ਸੱਚ ਦਾ ਉਪਦੇਸ਼ ਕਿਸੇ ਨੂੰ ਮਿਲਿਆ ਪੂਰੇ ਗੁਰ ਤੋਂ ਮਿਲਿਆ। ਈ ਵੀ ਸੱਚ ਦਾ ਉਪਦੇਸ਼ ਮਿਲਿਆ ਪੂਰੇ ਗੁਰ ਤੋਂ ਮਿਲਿਆ। ਨਾਉਂ ਲਿਖਦਾ ਇਹ ਗੱਲ ਤੁਹਾਨੂੰ ਸੁਣਾ ਰਿਹਾ ਦੱਸ ਕੇ ਪੂਰੇ ਗੁਰਦੇਵ ਤੋਂ ਸੱਚ ਦਾ ਉਪਦੇਸ਼ ਮਿਲਿਆ ਹੋਵੇ ਕਿਸੇ ਨੂੰ ਇਹ ਨਹੀਂ ਹੋ ਸਕਿਆ ਅਜੇ ਤੱਕ ਨਾ ਵਾਸਤੇ ਹੋਊਗਾ ਪੂਰੇ ਉਪਦੇਸ਼ ਹੈ ਜਿਹੜਾ ਗੁਰਬਾਣੀ ਇਹਦੇ ਵਿੱਚ ਸੱਚ ਗਲੂਗਾ ਇਹ ਜੋ ਕਿਸੇ ਨੂੰ ਮਿਲਿਆ ਇਹ ਜੋ ਬਣਦਾ ਰਹੂਗਾ ਹੋਰ ਕਿਤੋਂ ਗੁਰਬਾਣੀ ਪਿੱਛੇ ਛੱਡ ਕੇ ਸੱਚ ਦਾ ਉਪਦੇਸ਼ ਛੱਡ ਨਹੀਂ ਮਿਲਣਾ ਸਾਚੀ ਜੀ ਸੋਜੀ ਧਈ ਹੋਣੀ ਇਹ ਗੱਲ ਜ਼ਰਾ ਹੈ ਆ ਮੈਂ ਤੇ ਖੋਲ ਕੇ ਕਹਿ ਤੀ ਠੀਕ ਹੈ ਇੱਥੇ ਭਲੇਖਾ ਇਹ ਨਾ ਪੈ ਜਾਵੇ ਕਿ ਪੂਰਾ ਗੁਰ ਜਿਹੜਾ ਉਹ ਗੁਰੂ ਹੁੰਦਾ ਗੁਰ ਸਤ ਗੁਰ ਹੁੰਦਾ ਜਿਹੜਾ ਸਾਫ ਤੋਂ ਸੂਰਤ ਦਸਤਾਰ ਖਰਿਆ ਵਾਸਤੇ ਪੂਰਾ ਗੁਰ ਚਾਹੀਦਾ ਗੁਰੂ ਤਾਂ ਪੂਰਾ ਹੀ ਹੁੰਦਾ ਹਮੇਸ਼ਾ ਹੈ ਜੀ ਠੀਕ ਹੈ ਜੀ ਸੱਚ ਪੂਰਾ ਗੁਰ ਉਪਦੇਸ਼ਿਆ ਨਾਨਕ ਸੁਣਾਵੇ ਤੇ ਤੀਸਰੀ ਪੌੜੀ ਦੀ ਸਮਾਪਤੀ ਹੈ ਜੀ ਨਾਲੇ ਬਸੰਤ ਕੀ ਵਾਰ ਮਹੱਲ ਪੰਜਵਾਂ ਇਹਦੀ ਵੀ ਨਾਲੇ ਸਮਾਪਤੀ ਹੈ ਜੀ